जयप्रसाद आरोग्य कंचन देही जयप्रसाद आरोग्य कंचन देही जे अंदर दी देही है कंचन तो कच्च नहीं रहता देही दे विच आरोग्य तो हुदी जदो विच दे अहंकार नहीं रहंदा तो कारेच कच्चा है जो हो चली जाती है फेरे देही जेडी है आरोग्य और आरोग्य हो जाती है ਵਾਲਿ ਦੇਹੀ ਦੀ ਗੱਲ ਨਹੀਂ ਹੈ ਵਾਲਿ ਦੇਹੀ ਕਦੇ ਰੋਗ ਹੋਏ ਦੀ ਜੋਗੀ ਵਾਲਿ ਦੇਹੀ ਨੂੰ ਜਦੋਂ ਰੋਗ ਰਹੂਗਾ ਹੀ ਰਹੂਗਾ ਇਹ ਪੰਕਤੀ ਬਾਅਦ ਨਹੀਂ ਲੱਗਦੀ ਕਦੇ ਜੀ ਜੇ ਪ੍ਰਸਾਦ ਅਰੋਗ ਦੇ ਜੀ ਆਹੋ ਟੈਂਸ਼ਨ ਨਹੀਂ ਕੀ ਹੋ ਗਿਆ ਹਾਂ ਤੇ ਜੀ ਹੁ ਕੰਮ ਕਰਦਾ ਕੀ ਹੋ ਗਿਆ ਤੇ ਜੇਰਾ ਤਾਂ ਹੈਗੀ ਥਾਰੇ ਠੀਕ ਹੈ ਮੈਂ ਸੁਣਨ ਤੇ ਕੀ ਕਹਿੰਦਾ ਤੂੰ ਹੈ ਤੂੰ ਥਾਰਾ ਨਹੀਂ ਰੋਗ ਤੇਰਾ ਕਹ ਰਿਹਾ ਇਹ ਬਾਲ ਨਹੀਂ ਤੇ ਹੈ ਦੇਰੋਂ ਦਾ ਜਿਹੜੀ ਦੇ ਝੂਠ ਬੋਲਦੇ ਨੇ ਮੈਨੂੰ ਪਤਾ ਜੀ ਯਾਰ ਉਹ ਤਾਂ ਦੇਰੋਂ ਤਾਂ ਹੁੰਦੀ ਦੀ ਉਹ ਫਰਜਣਾ ਹਾਂ ਬੇਹੈਨ ਕਹਦਾ ਉਹ ਸਭ ਦੇਖਦਾ ਨਾ ਤਾਂ ਐਸਾ ਰੋਗ ਛਪੜਾਈ ਹੋਇਆ ਕਹਿੰਦੇ ਰੋਗ ਐ ਛਪੜਾਈ ਹੋਇਆ ਕਹਿੰਦੇ ਇਹਨਾਂ ਨੂੰ ਇਹਦੇ ਵਿੱਚ ਚੁੱਪ ਕਰ ਦਿਓ ਭਾਈ ਇਹ ਰੋਗ ਹੋਵੇ ਦੇ ਇਹ ਵੀ ਹੈ ਗੱਲ ਰੋਗ ਰੋਗ ਰੋਗੀ ਰੋਗੀ ਖੜਾ ਜਾਣਾ ਚਲ ਦੇਈ ਦਾ ਬਾਅਦ ਚ ਕਰਨਗੇ ਹੈ ਪਹਿਲਾਂ ਆਪਾਂ ਨਹੀਂ ਕਹਦੇ ਵੀ ਜੇ ਨੂੰ ਦੇਈ ਮੰਦੇ ਰੋਗ ਇਹ ਇਹ ਰੋਗ ਹੋਈ ਕੰਚਨ ਤਾਂ ਨਾ ਕਿਹਾ ਨਾ ਲੇ ਹੁਣ ਉਹ ਬਾਲਿ ਸੋਣੇ ਦੀ ਹੈ ਕਾਇਤਸਾਹ ਕਰੋ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸਨੇਹੀ ਆਹ ਉਹ ਰਾਮ ਸਨੇਹੀ ਜਿਹੜਾ ਉਹਦੇ ਚ ਰਹਿਦਾ ਲੇਵ ਲਾਵੋ ਤਿਸ ਰਾਮ ਲੇਵ ਲਾਵੋ ਬੁੱਧੂ ਤੇਰੇ ਚੜ੍ਹ ਗੁੜੀ ਜਾ ਟਿਕਾ ਮਨ ਸੁਖ ਪਾਵੇ ਹਰ ਬਾਦਸ ਦੇਖੋ ਜਿਸ ਬਾਤ ਕੋਨੇ ਨੇ ਹੋ ਗਏ ਹੁਣ ਉਹ ਮਨ ਨੂੰ ਕਹਿੰਦੇ ਹੁਣ ਤੋਂ ਲੈ ਬਲਾ ਉਥੇ ਬੜਵਾਂ ਕਾਣ ਪੜ ਕੇ ਆਇਆ ਵੀ ਉਦੋਂ ਜਾ ਕਉਣ ਛੱਡਦੇ ਜੇਲਾ ਵੀ ਉਹ ਦੇਹੀ ਨਾ ਬੇ ਉਹਦੇ ਰੋਗ ਆ ਫਲਾਣਾ ਢਮਗਾ ਹੈ ਹੁਣ ਲੋਗ ਹੈ ਨਹੀਂ ਚੱਲ ਤਾਂ ਉਹ ਤੇ ਹਾਂ ਉਹ ਕੁੱਚ ਤਾਂ ਬੁੱਧੀ ਨਹੀਂ ਢੀਕਿਆ ਕੱਚ ਬੁੱਧੀ ਨਾਲ ਢੀਕ ਕਰਤਾ ਤਾਂ ਥੋੜੀ ਥੋੜੀ ਥੋੜੀ ਥੋੜੀ ਕਹਾਣੀਆਂ ਬੰਦੀ ਜਾਂਦੀ ਹੈ ਵੈਸੇ ਜੈ ਪ੍ਰਸਾਦ ਤਰਾਉ ਉਹਲਾ ਰਹਤ ਜੇ ਪ੍ਰਸਾਦ ਤੇ ਉਹ ਲੜਾ ਰਹੇ ਤਾ ਮਨ ਸੁਖ ਪਾਵੇ ਹਰ ਹਰ ਜਸ ਕਰੇ ਇਹ ਬੰਦਾ ਹੀ ਉਹ ਲੜਾ ਜੁੜ ਕੇ ਰਹਿ ਜਾਣਾ ਤੇਰਾ ਕੋਨੇ ਚਿਤਾ ਮਨ ਜੇਰਾ ਕੋਣ ਨਾ ਗੋਣ ਕੋਣ ਗੋਣੀ ਜਿਦਾਦਾ ਹੋ ਉਹ ਉਹ ਨਾ ਹਦੂ ਇਹਨਾਂ ਚੱਲਦਾ ਅੰਦਰ ਤੋਂ ਹਦ ਤੇ ਕੇ ਰਾਂ ਅੱਤਵਾਲ ਨਹੀਂ ਗਾਦੀ ਨੀ ਐ ਕਰਦਾ ਐ ਕਰਦਾ ਤੇਰਾ ਠੀਕ ਆ ਉਹਦਾ ਚਲੋ ਛੱਡੋ ਨਿਆਣਿਆਂ ਦੇ 100 ਗੱਲਾਂ ਹੋ ਜਾਂਦੀਆਂ ਨੇ ਕਿਛਰੇ ਆਪਣਾ ਬਕਸ਼ ਲੈ ਕੇ ਮਾਰਕਾ ਹੋ ਜਾ ਠੀਕ ਹੈ ਸੋਸਾਇਟੀ ਤੂੰ ਵਿੱਚ ਬੈਠਾ ਕਰ ਲਈਦੀ ਐ ਗੱਲਾਂ ਗੱਲ ਤਾਂ ਖੀ ਹੁਣ ਤਾਂ ਛੱਡ ਪੀਆ ਨਾ ਹੁਣ ਦੀ ਆਪਾਂ ਕਦੀ ਕਾਹਨੂੰ ਨਹੀਂ ਕਰਨਾ ਕਾਹਾਂ ਦੀ ਗੱਲ ਕਰੋ ਪਿਛੇ ਦੀ ਦੀ ਗੱਲ ਕਰਨੀ ਹੋਣੀ ਪਿਛੇ ਤਾਂ ਮੋੜਾ ਫੇਰ ਹੀ ਦੇ ਨਾ ਦਾਦਾ ਜੀ ਕਹਿੰਦਾ ਪਿੱਛੇ ਮੋੜਾ ਹੀ ਦੀ ਫੇਰਨਾ ਆਪਾਂ ਪਿੱਛੇ ਝੱਕੜਾ ਹੀ ਨਹੀਂ ਪਿਛਲੇ ਓਗੜਾਂ ਦੀ ਗੱਲੇ ਦੀ ਜਦਾਲ ਦੀ ਜਿਹੜਾ ਘੋੜਾ ਆਪ ਘੋੜਾ ਵਿਚਾਰਿਆ ਇਹ ਛੜ ਤੇ ਜਿਹੜੀ ਆ ਤੁਸੀਂ ਛੜਤੀ ਛੜਤੀ ਗੱਲ ਕਰਦਾ ਛਡਾਉਣ ਵੇਲੇ ਤਾਂ ਉਹ ਕਹਿ ਸਕਦੇ ਆ ਛਡਾਉਣ ਵੇਲੇ ਚੱਲ ਗੱਲ ਕਰਦਾ ਕਾ ਜੀ ਪ੍ਰਸਾਦ ਤੇਰਾ ਉਹਨਾਂ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ। ਹਾਂ ਸੁਖ ਪਾਵੇ ਹੁਣ ਸੁਖ ਹਰ ਹਰ ਜਸ ਕਹਿ। ਹਰ ਹਰ ਜਸ ਕਹਿ। ਹਾਂ ਹਰ ਜਸ ਹਰ ਜਸ ਹੈ ਕਹਾ ਹਰ। ਛੱਡੀ। ਇਹਾਂ ਸੁਖ। ਜੈ ਪ੍ਰਸਾਦ ਤੇਰੇ ਸਗਲ ਸਿਧੂ ਟਾਕੇ। ਜੈ ਪ੍ਰਸਾਦ ਤੇਰੇ ਜਿਹਨਾਂ ਤੇ ਆਉਣਦੇ। ਜਿਹਦੇ ਆਉਣਦੇ ਉਹ ਸਰਾਸ ਦੇ ਚਿਤਰਦੇ। ਸਰਾਸ। ਸਰਾਸ। ਵੇੜਾ ਉਹਦਾ ਪਹਿਲਾ ਮੱਤ ਦਿੱਤਾ ਜਾਣਾ ਨਹੀਂ ਛੇਕਦੇ ਹਜ਼ਾਰਾਂ ਗਲਤੀਆਂ ਦੀਆਂ ਉਹ ਸਾਦੀਵੇਂ ਢੱਕੀਆਂ ਪਰਦਾ ਰਹਿਤਾ ਪਰਦਾ ਰਹਿਤਾ ਪਾਟ ਪਟਬਰ ਉਹ ਪਰਦਾ ਪਾਤਾ ਨਾ ਤੇ ਸਾਰੀ ਨਤੀ ਹਾਂਜੀ ਜੈ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਪਰ ठाकुर प्रभु ताके मान साहब ने प्रभु ठाकुर प्रभु ताके वो उठा कर दी छंड पर वो फार्म में ठाकुर के आई हो सारी गल उठी आई जंदी है उठी आई ਦੀਦੀ ਕਿਰਪਾ ਨਾਲ ਤੇਰੇ ਮੁਕਾਬਲੇ ਦਾ ਦੁਆ ਬਸਾ ਨਹੀਂ ਕਰਦਾ ਇੱਕ ਕਰਕ 11 ਹੋ ਜਾਉਂ ਤੂਚੇ ਜੇ ਦੁਆ ਹੋਵੇ ਤਾਂ ਕਰਕ 11 ਹੋ ਜਾਊਗਾ ਜੇ ਰਿਤਿਆ ਹੋਵੇ ਉਹਦੇ ਨਾਲ ਤਾਕਤ ਵਧੂਗੀ ਤੇ ਬਰਾਬਰੀ ਦੀ ਸ੍ਰੀ ਕਿਤਨੀ ਹੈ ਤੇ ਜੇ ਪ੍ਰਸਾਦ ਉਹ ਸ੍ਰੀ ਕਾਹੇ ਦੀ ਜੇ ਪ੍ਰਸਾਦ ਜੀ ਦੀ ਕਿਰਪਾ ਸੁੱਧ ਕੋ ਨਾ ਪਹੁੰਚੇ ਕੋਈ ਹੋਰ ਕਿਰਪਾ ਕਰ ਦਵੇ ਜਿਹੜੀ ਕਿਰਪਾ ਉਹਨੇ ਕਾਬੀਆਂ ਉਲਟੀ ਕਿਰਪਾ ਦੇਦੇ ਹੋਈ ਨਹੀਂ ਸਕਣ ਜੋ ਉਹਦੀ ਕਿਰਪਾ ਜੋ ਪ੍ਰਾਪਤੀ ਹੈ ਕਿਸੇ ਨੂੰ ਪ੍ਰਾਪਤੀ ਹੋਈ ਨਹੀਂ ਸਕਣੀ ਇਸ ਕਰਕੇ ਤੇਰੀ ਬਰਾਬਰੀ ਦੀ ਕਰਨ ਨਹੀਂ ਹੋ ਸਕਦਾ ਜੈਤੋ ਅਬਨਾਸ਼ੀ ਰਾਜ ਮਿਲਿਆ ਉਹਨੂੰ ਕਿਸੇ ਨੂੰ ਮਿਲਿਆ ਨਹੀਂ ਸਕਦਾ ਆਪਣੀ ਗੱਤੋ ਗੱਲ ਨੂੰ ਸਾਚੇ ਕਰਨ ਦਾ ਟਾਈਮਿੰਟਰੀ ਹੈ ਕਿ ਉਹਨੂੰ ਪੜਨੀ ਹੁੰਦੀ ਜਿੱਤੇ ਤੇਰੀ ਗੱਲ 'ਚ ਜਾਣ ਹੈ ਤਾਂ ਜਾਨ ਰੈਡੀ ਹੁੰਦੀ ਜਿੰਨਾ ਤੇਰੇ ਕੋਲ ਗਿਆਨ ਹੈ ਗਿਆਨ ਕਿਸੇ ਨੂੰ ਬਿਲਣਾ ਹੀ ਨਹੀਂ ਦੀ ਤੇਰੇ ਕੋਲ ਦਰਪਾ ਤਾਂ ਕਿਸੇ ਕੋ ਹੁਣ ਹੋਈ ਨਹੀਂ ਹੋਣ ਤੋਂ ਕੋਣ ਭੈ ਮੁਕਤ ਹੋ ਗਿਆ ਭੈ ਮੁਕਤ ਹੋ ਗਿਆ ਉਹ ਕੋਲ ਇਹ ਉਹ ਬਣਦਾ ਕੋਈ ਕੋ ਰਹਿੰਦਾ ਕੋਣਾ ਪਹੁੰਚਾ ਹੁਣ ਆ ਭਗਤ ਨੇ ਤੇ ਇਹਨੂੰ ਬੜਾ ਛੋਟਾ ਕਹਿੰਦੇ ਆਪਾਂ ਹੱਸ ਕੋਣ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਐਸੇ ਉੱਚੇ ਪ੍ਰਭ ਨੂੰ ਸਾਥ ਸਾਥ ਕਰਨਾ ਚਾਹੀਦਾ ਹੈ ਕਿਰਪਾ ਨਾਲ ਸਭ ਤੋਂ ਤੇਰਾ ਜਿਹੜਾ ਪ੍ਰਤਾਪ ਹੈ ਉਹਦੇ ਪ੍ਰੋਫਰ ਹੁੰਦੇ ਜਾਂਦਾ ਤਾਂ ਦਾਬ ਹੁੰਦੇ ਸੇ ਪਰ ਮੁਕਾਬਲਾ ਕੋਈ ਨਹੀਂ ਸਰਦਾ ਤੇਰੀ ਬੱਤ ਦੇ ਮੁਕਾਬਲੇ ਦੀ ਹੋਰ ਕਿਸੇ ਨੂੰ ਮਤ ਹੋ ਨਹੀਂ ਸਕਦੀ ਤੇਰੀ ਬੁੱਧੀ ਦੇ ਮੁਕਾਬਲੇ ਦੀ ਕਿਸੇ ਕੋ ਬੁੱਧੀ ਹੋ ਨਹੀਂ ਸਕਦੀ ਤੇਰੇ ਕੋਲ ਜਿਹੜਾ ਤਾਨੋ ਜਾਂ ਤਨ ਉਹਦੇ ਮੁਕਾਬਲੇ ਦਾ ਕਿਸੇ ਨੂੰ ਜਾਂ ਤਨ ਹੋਵੇ ਮੁਕਾਬਲੇ ਦਾ ਹੋਰ ਗੱਲ ਹੋਦੀ ਹੈ ਮੁਕਾਬਲਾ ਕਰ ਜਿਵੇਂ ਉਹ ਸ਼ਾਸਰਤ ਕਰਦੇ ਤੇ ਚਰਚਾ ਗਿਆਨ ਕਰਦੇ ਤੇ ਗਿਆਨ ਚਰਚਾ ਹੋਰ ਗੱਲਾਂ ਗਿਆਨ ਵਿਚਾਰ ਹੋ ਗਏ विचार होर गल्ला चर्चा होर गल्ला तो ध्यान बाबरी त ख्याल विचार ना पाया गान विचार है चर्चा दा हुण वेतरी कर दे चर्चा ता बहस है हम्म सतर सतर बहस है जल्दी जयप्रसाद भाई ਆਪੋਸ਼ਟਿਕ ਨਹੀਂ ਨਹੀਂ ਉਹ ਚਰਚਾ ਸੇਵਾ ਤੋਂ ਨਹੀਂ ਚਰਚਾ ਹੋਇਆ ਠੀਕ ਹੈ ਤਾਂ ਚਰਚਾ ਹੋਈ ਸਵਾਲ ਨੇ ਉਸੇ ਸ਼ਬਦ ਨੂੰ ਰੋਕਿਆ ਵੀ ਜਦ ਦਬਹਿਤਵਾਰ ਨੂੰ ਜਾਣ ਲੱਗੀ ਰੋਕਿਆ ਵੀ ਆ ਰੋਕਿਆ ਵੀ ਆ ਜੇ ਪ੍ਰਸਾਦ ਭਾਈ ਦੁਰਲਭ ਦੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਦੀ ਭਗਤੀ ਕਰੇ ਆ ਦੋ ਲਬ ਦੇ ਵਾਹ ਤੁਹਾਡਾ ਸਤਿ ਸ਼੍ਰੀ ਅਕਾਲ ਇਕਾਦੇ ਦੋ ਲਬ ਦੇ ਜੀ ਵਾਹ ਅੰਦਲੀ ਦੇ ਇਹਦਾ ਤੂੰ ਆਪਈ ਆ ਪਾਈ ਕੀ ਹੈ ਪਾਈ ਇਹ ਹੈ ਹੈ ਦੋ ਲਬ ਤੇ ਹੈ ਦੇ ਥੱਲੇ ਦੀਆਂ ਜੀਆਂ ਚੜ ਕੇ ਆਏ ਆ ਦੋ ਬਹੁ ਦੂਰੋਂ ਨਵੀ ਹੈ ਦੂਰੋਂ ਚੱਲ ਕੇ ਆਇਆ ਹੈ ਪੰਥ ਵੀ ਇਹਦੇ ਦੀ ਤਾਂ ਪ੍ਰਾਪਤ ਹੋਈ ਹੈ ਉਸਤਾਂ ਨਾੜੀ ਹੋਈ ਜਿਹੜੀ ਤੇਹੀ ਆ ਜੇ ਪ੍ਰਸਾਦ ਪਾਇ ਜੋ ਹਰ ਵਕਤ ਗੁਰਸੇਵਾ ਦੇ ਕੰਮ ਸੁਕਮਾਈ ਤਾਂ ਮਾਰਤੇ ਹੀ ਭਾਈ ਭਗਤੀ ਉਹਦੀ ਭਗਤੀ ਕਰ ਜੀ ਵੀ ਕਿਰਪਾ ਨਾਲ ਉਹ ਲੱਭਦੇ ਬीडीਏ ਤੇ ਕੋਈ ਇੰਨਾ ਕੁਛ ਹਾਂ ਜੀ ਪ੍ਰਸਾਦ ਦਾ ਪਤੰਬਰ ਮਿਲਿਆ ਹਾਂ ਹਾਂ ਸੰਚਨ ਦੇ ਹਾਂ ਕੱਲ ਪਹਿਲਾਂ ਤਾਂ ਫਾਇਰ ਜਿਆਦਾ ਚੱਕਿਆ ਤੇ ਹੁਣ ਕਿਤੇ ਕਿਤੇ ਲੱਗ ਜਾਂਦਾ ਪਤਾ ਲੱਗ ਜੁਣ